ठाको मनवा राखो ठाएं ठेक मुई अब गुण पछताए ठाको बळुवा राखो ठाए रोको बळुवेलु मनवा बळुलो के राखो राखो ठाए एक दाणी राखो रोके ठेक ਦੇਈਦਾ ਭਾਇਆ ਨੇ ਲਈਦਾ ਹੁਕਮ ਨਾਲ ਠੈਕ ਠੈ ਮਰ ਜਾਣਾ ਤਾਂ ਹੁਕਮ ਦਾ ਵਿਰੋਧ ਕਰ ਕਰਕੇ ਆਪ ਗੁਨੇ ਹੁਕਮ ਦਾ ਵਿਰੋਧ ਕਰਕੇ ਠੈਕ ਦੀਏ ਹੁਕਮ ਨਾਲ ਮਰ ਜਾਂਦੀ ਹੈ ਹੁਕਮ ਦਾ ਕੋਈ ਜਲੀ ਵਿਗਾੜਦਾ ਕੋਈ ਜਲੀ ਵਿਗਾੜ ਸਕਦੀ ਆਪਣਾ ਰੋਸ ਪੁਆਰਦੀ ਹੈ ਕੋਈ ਪੈਸਾ ਹੈ ਕੋਈ ਤੌਹਵੀਲਦੀ ਹੈ ঠাকুর এক সবাই নার বহতে বেশ করে কুদিয়ার ঠাকুর দাই কইয়া হম দাই কইয়া আতি সারি দে কতিয়া তা সারি দে সোচা তা ওদে কই सहमत আয়ে কই ওদে খারাপ ঠেকে নলি হইদে ওতে ও ਵ্যাসে ਨਾਲ নে চলনে যায় সে ওদে হুকম জে চলতিও বীরে চলদিয়া নে কাই চলন ন কাই চৌদিয়া দি চলন ਉਜਮੋ ਦੇ ਚੱਲਣ ਵਾਲੀ ਉਹ ਫੇਰ ਲੈ ਆਪਣੇ ਇੱਥੇ ਚੱਲਣ ਵਾਲੀ ਪਾਸੇ ਠੀਕ ਹੈ ਜੀ ਇਸ ਲਾਈਨ ਦੇ ਚੱਲਣ ਵਾਲੀ ਇੱਕ ਚੱਲਣ ਵਾਲੀ ਉਹ ਗੁਰਬਕੀਰ ਹੈ ਡੱਡੇ ਨਾਲ ਚੱਲਣ ਵਾਲੀ ਜਿਹੜੀਆਂ ਨੇ ਠੈਕ ਠੈਕ ਚੱਲਣ ਵਾਲੀ ਉਹ ਗੁਰਬਕੀਰ ਹੈ ਠੀਕ ਹੈ ਜੀ ਬਹੁਤੇ ਵੇਸ ਕਰੇ ਕੂੜਿਆਰ ਜਿਹੜੀ ਕੂੜੀ ਮਾਤਾਂ ਬਹੁਤੇ ਵੇਸ ਕਰਦੀਆਂ ਨੇ ਕੂੜਿਆਰ ਨੇ ਪਤਰੀਆ ਜਿਹੜਾ ਸਾਰੇ ਕੂੜੇ ਨੇ ਸੈਡ ਦਾ ਕਿੰਨੇ ਬੋਤਾਂ ਨੇ ਸੰਸਾਰ ਚ ਸਭ ਕੂੜੀਓਈ ਦੇ ਠੀਕ ਹੈ ਇਸ ਜਿਹੜੀ ਪਹਿਲੀ ਲਾਈਨ ਹੈ ਇਹਦਾ ਅਰਥ ਲੋਕ ਕੁਝ ਗਲਤ ਲੈਨੇ ਠਾਕੁਰ ਇੱਕ ਸਭਾਈ ਨਾਰੋ ਕਹਨੇ ਵੀ ਇੱਕ ਅਕਾਲ ਪੁਰਖ ਮਰਦਾ ਬਾਕੀ ਸਾਰੀ ਇਹ ਸ੍ਰਿਸ਼ਟੀ ਨਾਰ ਇੱਥੇ ਕੁਛ ਭਾਵ ਹੋਰ ਬਣਦਾ ਹੈ ਨੀ ਉਹ ਜਿਹੜਾ ਉਹ ਮਰਦਾ ਕਹਿੰਦੇ ਨੇ ਜਿਹੜਾ ਸਰੀਰ ਹੈ ਨਾ ਨਹੀਂ ਉਹ ਕੇ ਨਹੀਂ ਉਹ ਕਹਿੰਦੇ ਅਕਾਲ ਪੁਰਖ ਹੈ ਨਾ ਪੁਰਖ ਕਹਿੰਦੇ ਹੋਈ ਹੈ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਉਹ ਇੱਕ ਦੇ ਗੁਣ ਹੈ ਕੋ ਪਰਮੇਸ਼ਰ ਦੇ ਗੁਣ ਹੈ ਇਲੇ ਹੀ ਜਿਹੜਾ ਹੁਕਮ ਹਾਂਜੀ ਉਹ ਇੱਟਾ ਉਹ ਪੁਰਖ ਹੈ ਹਾਂ ਅਕਿ ਜਿੰਨੇ ਉਹਦੇ ਅਧੀਨ ਦੇ ਸਭ ਨਾਲ ਅੱਛਾ ਜੀ ਆਪਾਂ ਤੁਹਾਨੂੰ ਆਦੀ ਚੱਲਣਾ ਹਾਂ ਜਿਹੜਾ ਬਾਣੀ ਚ ਅੰਦਰ ਸਭ ਕੋ ਜਾਗੋ ਗਿਆ ਹੁਕਮ ਅੰਦਰ ਸਭ ਕੋ ਇਸ ਕਰਕੇ ਭਗਤਾਂ ਨੇ ਇਸ ਤੀਰਤ ਲਖਨੂ ਵਰਤੇ ਆਪਣੇ ਵਾਸਤੇ ਠੀਕ ਹੈ। ਅਠਗੰਡਾ ਵਾਲੇ ਸਾਡੇ ਇਸ ਤੀਰਤ ਲਖਨੂ ਵਰਤੇ ਜੀ। ਪਰ ਘਰ ਜਾਤੀ ਥਾਕ ਰਹੀ ਮਹਿਲ ਬੁਲਾਈ ਥਾਕ ਨਾ ਪਾਈ। ਹਰ ਜਾਤੀ ਜਾਗ ਰਹੀ ਹਰ ਕਲ ਤੋਂ ਨਹੀਂ ਫਿਰਦੀ ਹੈ ਹਾਂ ਹਾਂ ਸਾਧਲੇ ਹਾਈ ਜੇ ਤੇਰੇ ਰੋਕੀ ਜੋਗੀ ਦੇ ਦੋ ਚਾਰ ਮਿੰਟ ਬਾਅਦ ਸੇ ਰੁਕ ਗਈ ਹੂੰ ਰੋਗ ਦੇ ਵੀ ਨੇ ਦੋਸਤ ਮਾਰਾ ਫੜ ਕੇ ਹਰ ਕੰ ਜਾਤੀ ਜਾਗ ਰਹੀ ਬਹਿਲ ਬਲਾਈ ਜਾਗਲ ਭਾਈ ਜੇ ਬਹਿਲ ਅੱਤਰ ਹਿਰਦੇ ਚ ਬਲਾਈ ਉੱਥੇ ਵੀ ਰੁਕੀ ਕਰਕੇ ਹੂੰ ਭਾਰਤ ਦਾ ਰੁਗੀ ਤਰੁਕੀ ਦਾ ਰੁਗੀ ਦਾ ਜਨਮ ਅੰਦਰ ਦੀ ਰੁਗਦੀ ਅੱਛਾ ਜੀ ਅੰਦਰ ਨਹੀਂ ਭਰਦੀ ਅੰਦਰ ਮੌਤ ਹੈ ਹੂੰ ਅੰਦਰ ਦੀ ਸੁਲਝਉਂਦੀ ਅੰਦਰ ਗਈਆਂ ਬਰੀ ਮੌਤ ਆਉਂਦੇ ਉਦੋਂ ਨਹੀਂ ਹੁੰਦਾ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਇਹਨੂੰ ਸ਼ਬਦਾਂ ਨਾਲ ਹੀ ਸਵਾਰੀ ਗਈ ਜਿਹਦੀਆਂ ਦਬਲੀਆ ਸ਼ਬਦਾਂ ਦੇ ਉਪਦੇਸ਼ੋਂ ਦੂਰ ਹੋ ਗਈ ਉਹ ਉਠਾ ਕੇ ਬਿਗੜਦਾ ਹਰ ਬਣ ਜਾਂਦੀ ਹੈ ਸਾਥ ਆਪਣੇ ਘਰ ਚ ਪਾ ਲੈਂਦਾ ਗਲੇ ਲਾ ਲੈਂਦਾ ਹੈ ਛਾਈ ਸਗਣੇ ਠਾਜ਼ਰਤਾਰੀ ਉਹ ਇਸ ਵਗਣੇ ਠਾਜ਼ਰਨੇ ਗਲੇ ਦਾ ਹਰ ਬਣ ਜਾਂਦੀ ਗੁਰ ਗ੍ਰੰਥ ਅੰਲੰਦਾ ਪਰ ਸਾਈ ਸਵਾਗਨ ਠਾਕੁਰ ਕਰ ਲਈ ਠੀਕ ਹੈ ਜੀ ਹਾਂ ਹੁਕਮ ਨੇ ਦੇਰੀ ਧਾਰ ਲਈ ਹਾਂ ਜੀ ਹੁਕਮ ਨੇ ਬਾਲਾ ਬੜਕਾ ਬਣ ਗਈ ਹੂੰ ਹੂੰ ਹਾਰ ਦਾ ਬਣ ਗਈ ਠੀਕ ਹੈ ਜੀ